ਸ਼ਲੋਕ ਮਹੱਲਾ 3 ਸਤਿਗੁਰੂ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਦਿੱਠੈ ਮੁਕਤੀ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਸਤਿਗੁਰੂ ਦਾ ਸਾਰੇ ਹੀ ਵੇਖਦੇ ਜਿੱਤਾ ਜਗਤ ਸਰ ਜਗਤ ਸਰ ਸਾਰੇ ਵੇਖਦੇ ਹੋ ਤੈਨੂੰ ਕਵੀਰ ਨੂੰ ਸਾਰੇ ਹੀ ਜੇ ਪਹਿਲਾਂ ਨਹੀਂ ਹੋਈ ਹੁਣ ਦਰਸ਼ਨਾਂ ਗੁਰਮਤ ਕੀ ਕਹਿੰਦੀ ਹੈ ਤੁਸੀਂ ਕੀ ਕਹਿ ਰਹੇ ਹੋ ਚਿੱਟੇ ਮੁਕਤ ਨਾ ਹੋ ਬਈ ਜੇ ਚਰਬਦ ਨਾ ਕਰੇ ਵਿਚਾਰ ਜਿੰਨਾ ਚਿਰ ਉਹਨਾਂ ਨੇ ਜੋ ਕਿਹਾ ਹੈ ਦਾ ਜੋ ਉਪਦੇਸ਼ ਉਹਦੀ ਵਿਚਾਰ ਨਹੀਂ ਕਰਾ ਉਹਦਾ ਚਰ ਕੁਛ ਵੀ ਦੀ ਦਰਸ਼ਨ ਨਾਲ ਮੁਕਤੀ ਹੋਣ ਵਾਲੀ ਉਹਨਾਂ ਨੂੰ ਪਤਾ ਸੀ ਪਿੱਛੋਂ ਇਹ ਕਹਿਣਗੇ ਕਿ ਸਾਨੂੰ ਉਹਦੇ ਦਰਸ਼ਨ ਹੋਗੇ ਗੁਰੂ ਦੇ ਹੋਵੇ ਉਹ ਇੱਥੇ ਕੇ ਜਾਣ ਕੇ ਲਿਖ ਕੇ ਗਏ ਨੇ ਪੈਦਾ ਹੋਣਗੇ ਸ਼ਬਦ ਵਿਚਾਰ ਕਰੋ ਜੋ ਅਸੀਂ ਕਿਹਾ ਇਹਦੇ ਸਮਝ ਨਾਲ ਇਹ ਮੁਕਤੀ ਦਿਵਾ ਸਕਦਾ ਸਾਡਾ ਦਰਸ਼ਨ ਮੁਕਤੀ ਨਹੀਂ ਦਵਾ ਸਕਦਾ ਸਦੇ ਵੀ ਜੇ ਕੋਈ ਕਹੂਗਾ ਉਹ ਇਥੋਂ ਫੜ ਲਿਓ ਆ ਲਿਖਤਾ ਵਿੱਚ ਬਾਣੀ ਦੇ ਉਹਨਾਂ ਦੇ ਠੀਕ ਹੈ ਜੀ ਉਮੈ ਮੈਲ ਨਾ ਚੁੱਕਈ ਨਾਮ ਨਾ ਲੱਗਿਆ ਪਿਆਰ ਇਕ ਆਪੇ ਬਖਸ਼ ਮਿਲਾਇਨ ਦੁਭਜਾ ਤਜ ਵੀਕਾਰ ਜਿਹੜੇ ਦਰਸ਼ਨ ਕਰਦੀ ਗੱਲ ਕਰਦੇ ਨੇ ਅੰਕਾਰੀ ਨੇ ਉਹ ਅਸਲ 'ਚ ਆਪ ਗੁਰੂ ਬਣਨਾ ਸੰਤ ਕਹੋਣਾ ਚਾਹੁੰਦੇ ਨੇ ਵੀ ਸਾਡੇ ਪੈਰ ਫੜਨ ਲੋਕ ਵੀ ਇਹ ਨੂੰ ਦੱਸੋਗੇ ਹਉਮੈ ਮੈਲ ਨਾ ਚੁੱਕਈ ਉਹਨਾਂ ਦੇ ਅਸਲ ਉਪਕਾਰ ਦੀ ਬੈੜ ਨਹੀਂ ਲੈ ਸਕਦੀ ਉਹਨਾਂ ਨੂੰ ਅੰਕਾਰੀ ਬਣਦੇ ਨਾਮ ਨਾ ਲੱਗੇ ਪਿਆਰ ਨਾ ਉਹਨਾਂ ਦਾ ਨਾਲ ਪਿਆਰ ਪਾਣੀ ਦੀ ਖੋਜ ਨਾਲ ਪਿਆਰ ਨਹੀਂ ਤਾਂ ਗੱਲੇ ਨਹੀਂ ਕਰਦੇ ਉਹਨਾਂ ਦਾ ਬੂਤੀ ਬਣਾ ਕੇ ਪਸਤੀ ਤੇ ਬਾਦਸ਼ਾਹੀ ਇੱਕ ਆਪੇ ਬਖਸ਼ ਬੁਲਾਇਆ ਨਾ ਦੁਬਦਾ ਤਜ ਵਿਕਾਰ ਹਾਂ ਇੱਕ ਐਸੇ ਵੀ ਨਹੀਂ ਸਿੱਖੋ ਜਿਹਨੇ ਬਖਸ਼ ਦਿੱਤੇ ਇਹਨਾਂ ਨੇ ਸ਼ਬਦ ਵਿਚਾਰ ਦਿੱਤਾ ਉਹ ਮੁੱਖੇ ਜਾਂਦੇ ਨੇ ਨਾਲ ਬੁਲਾ ਲੈ ਜਾਂਦੇ ਨੇ ਜਿੱਤੇ ਗੁਰੂ ਮਿਲੇ ਹੋਏ ਨੇ ਸਤਗੁਰ ਮਿਲੇ ਹੋਇਆ ਉੱਥੋਂ ਮਿਲ ਜਾਂਦੇ ਨੇ ਯਾਦ ਦੁਬਦਾ ਤਜ ਵਿਕਾਰ ਪਰ ਪਹਿਲਾਂ ਦੁਬਦਾ ਛੱਡ ਦਿੰਦੇ ਨੇ ਔਰ ਵਿਕਾਰ ਛੱਡਲੇ ਪੈਦੇ ਦੋ ਚੀਜ਼ਾਂ ਛੱਡ ਕੇ ਵਿਕਾਰ ਔਰ ਦੁਬਦਾ ਗੁਰ ਮਿਲੇ ਹੋਏ ਨਾਨਕ ਮਿਲੇ ਆ ਹੋਇਆ ਜੇ ਅਪਾ ਜੀ ਪਾਸ਼ਾ ਮਿਲੇ ਹੋਏ ਨੇ ਸਾਰੇ ਉਹ ਵਿੱਚੇ ਹੀ ਮਿਲ ਜਾਣਗੇ ਮਿਲ ਜਾਣਗੇ ਜੀ ਹਾਂਜੀ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਗੁਰ ਹੇਤ ਪਿਆਰ ਐਸੇ ਵੀ ਸੀ ਜਿਨ੍ਹਾਂ ਨੇ ਸਤਗੁਰ ਦਾ ਪਹਿਲੀ ਵਾਰ ਦਰਸ਼ਕ ਕੀਤਾ ਹੀ ਬੰਦ ਮਰ ਗਿਆ ਬਸ ਜਦ ਇਹਨਾਂ ਨੂੰ ਸੌਂਪ ਦਿੱਤਾ ਪਹਿਲੀ ਨਜ਼ਰ ਚਈ ਬਸ ਦਰਸ਼ਨ ਵੇਖਦਾ ਵੇਖਦਾ ਅੱਖਾਂ ਨਾਲ ਹੈ ਦਰਸ਼ਨ ਕਰਦੇ ਹੁੰਦੇ ਨੇ ਜੋਤ ਦੇ ਦਰਸ਼ਨ ਹੋਰ ਚੀਜ਼ ਹੈ ਦੇਖਣਾ ਹੋਰ ਚੀਜ਼ ਹੈ ਦੇਖਣ ਵਾਲੇ ਭੂਤੀ ਪੂਜ ਕਰਦੇ ਦਰਸ਼ਨ ਵਾਲੇ ਭੂਤੀ ਪੂਜ ਨਹੀਂ ਕਰਦੇ ਉਹਨਾਂ ਦੀ ਅਵਸਥਾ ਨੂੰ ਦੇਖਦੇ ਨੇ ਉਹਨਾਂ ਦੇ ਪਵਿੱਤਰ ਤਰਨ ਉਹਨਾਂ ਦਾ ਕਿੰਨਾ ਪਵਿੱਤਰ ਹੈ ਉਹ ਉਹ ਚੀਜ਼ ਦੇਖ ਰਹੇ ਨੇ ਮਨ ਮਰ ਗਿਆ ਹੈ ਜੀ ਦਰਸ਼ਨ ਦੇਖ ਇਹ ਦਰਸ਼ਨ ਦਾ ਮਤਲਬ ਉਪਦੇਸ਼ ਦੀ ਗੱਲ ਕਰੋ ਉਪਦੇਸ਼ ਤੋਂ ਉਹਨਾਂ ਦਾ ਮਨ ਮਰ ਗਿਆ ਨਹੀਂ ਨਹੀਂ ਐਸੀ ਦਰਸ਼ਨ ਉਹਨਾਂ ਨੂੰ ਹੋਇਆ ਸਮਝਾਈ ਉਹ ਗੁਰੂ ਦੇ ਉਪਦੇਸ਼ ਤੋਂ ਉਹਨਾਂ ਨੇ ਆਪਣੀ ਵਰਜੀ ਛੱਡ ਕੇ ਗੁਰੂ ਮੰਨ ਲਏ ਸਤਗੁਰੂ ਮੰਨ ਲਏ ਠੀਕ ਹੈ ਜੀ ਤੇ ਕਿੰਤੂ ਪਰੰਤੂ ਕੀਤਾ ਹੀ ਬਿਲਕੁਲ ਠੀਕ ਹੈ ਪਰ ਉਪਦੇਸ਼ ਨਾਲੇ ਮਨ ਮਰਿਆ ਨਾ ਬਿਲਕੁਲ ਉਪਦੇਸ਼ ਨਾਲ ਮਰੂਗਾ ਸ਼ਬਦ ਨਾਲੇ ਸ਼ਬਦ ਠੀਕ ਹੈ ਠੀਕ ਹੈ ਤੇ ਉਹਨਾਂ ਦਾ ਕੋਈ ਫੇਸ ਦਾ ਮੂੰਹ ਦੇਖ ਕੇ ਨਹੀਂ ਇਹ ਗੱਲ ਹੋਈ ਉਹਨਾਂ ਤਾਂ ਉਪਦੇਸ਼ ਲੈ ਕੇ ਗੱਲ ਹੋਈ ਹੈ ਉਹ ਆਤਮਾ ਕਿੰਨੀ ਉੱਚੀ ਬਲਵਾਨ ਸੀ ਇਹ ਦਰਸ਼ਨ ਗੁਰਬਾਣੀ ਜੋ ਪਤਾ ਲੱਗਦਾ ਤੁਹਾਨੂੰ ਸਮਝ ਆਉਂਦੀ ਪਿਆਰ ਹੁੰਦਾ ਉਹ ਉਹ ਗੋਰੀ ਹੁੰਦਾ ਪਿਆਰ ਆਤਮਾ ਕਰਕੇ ਹੁੰਦਾ ਮੋਹ ਸ਼ਰੀਰ ਕਰਕੇ ਹੁੰਦਾ ਮਾਇਆ ਦੇ ਨਾਲ ਉਹ ਹੁੰਦਾ ਆਤਮਾ ਦੇ ਨਾਲ ਪਿਆਰ ਹੁੰਦਾ ਠੀਕ ਹੈ ਜੀ ਮਹੱਲਾ ਤੀਜਾ ਸਤਿਗੁਰੂ ਨਾਲ ਸੇਵਿਓ ਮੂਰਖ ਅੰਧ ਗਵਾਰ ਦੂਜੇ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਅਸਲ ਦੇ ਵਿੱਚ ਸਤਿਗੁਰੂ ਦੀ ਹੀ ਸੇਵ ਜਿਹੜਾ ਗੁਰਬਾਣੀ ਹੈ ਸਤਿਗੁਰੂ ਦੀ ਹੈ ਪਰਮੇਸ਼ਰ ਦੀ ਹੈ ਅੱਧੀ ਚਾਹੇ ਕਹੀ ਜਾਈਏ ਉਹ ਤਾਂ ਕਹਿਣਾ ਨੇ ਵੀ ਸਾਡੀ ਨਹੀਂ ਭਾਈ ਬਣਦੀ ਗੁਰਬਾਣੀ ਦੇ ਅਨਸਾਰ ਜੋ ਆਪਣਾ ਜੀਵ ਨੂੰ ਪਾਣੀ ਦੇ ਵਿੱਚ ਚਲਣਾ ਸਤਿਗੁਰੂ ਦੀ ਸੇਵਾ ਹੈ। ਆਹ ਸਤਿਗੁਰੂ ਦੀ ਹੈ ਇੱਕੋ ਹੀ ਗੱਲ ਹੈ। ਪਰ ਮੂਰਖ ਅੰਧ ਗਵਾਲ ਉਹ ਮੂਰਖ ਨੇ ਅਧੇ ਦੇ ਗਵਾਲ ਜਿਹੜੇ ਗੁਰਕੇ ਪਾਣੀ ਜਿਹੜੀ ਚੱਲੇ ਕਹਿਣ ਦਾ ਮਤਲਬ ਹੈ ਸਤਿਗੁਰ ਦੇ ਪਾਣੀ ਜਿਹੜੀ ਚੱਲੇ ਪਰਮੇਸ਼ਰ ਦੇ ਪਾਣੀ ਜਿਹੜੀ ਚੱਲਦੇ ਉਹ ਮੁਰਗਲੇ ਅਨੇਨੇ ਗਵਾਲ ਨੇ ਜਿਹੜੇ ਆਪਣੇ ਪਾਣੀ ਚੱਲਦੇ ਨੇ ਹਾਂਜੀ ਦੂਜੇ ਨੇ ਭਾਇਆ ਅਗਰ ਅਗਰ ਸਾਗਰ ਦਾ ਜੜਨ ਗਈ ਹੋ ਦੁੱਖ ਲੱਗੇ ਹੋਏ ਨੇ ਰੋਜ਼ ਅਰਦਾਸ ਵੀ ਕਰੀ ਜਾਂਦੇ ਉਹ ਫੇਰ ਦੀ ਛੱਡਦੇ ਠੀਕ ਹੈ ਜੀ ਜਿਨ ਕਾਰਨ ਗੁਰੂ ਵਿਸਥਰਿਆ ਉਪ ਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਣ ਹਾਰ ਜਿਹੜੇ ਕਾਰਨਾ ਕਰਕੇ ਤੁਸੀਂ ਨਾਨਕ ਗੁਰਮੁਖੀ ਸੁਖ ਪਾਇਆ ਜਿਹਦੇ ਵੀ ਸੁਖ ਪਾਇਆ ਗੁਰਮਤ ਦੁਆਰਾ ਹੀ ਪਾਇਆ ਹੈ ਬਖਸ਼ੇ ਬਖਸ਼ਣਹਾਰ ਉਹ ਔਗਣ ਪਿਛਲੇ ਜਿਹੜੀਆਂ ਗਲਤੀਆਂ ਹੁੰਦੀਆਂ ਉਹ ਜਾਂਦੀਆਂ ਨੇ ਪੜ ਸਾਰੀਆਂ ਗਲਤੀਆਂ ਬਖਸ਼ ਵੀ ਦਦਾ ਬਖਸ਼ਣਹਾਰ ਹੈ ਉਹ ਐਸਾ ਨਹੀਂ ਹੈ ਜਿੱਦੀ ਦੀ ਹੈ ਕਿਸੇ ਨੂੰ ਬਹਿਲ ਵਿਰੋਧ ਨਹੀਂ ਕਰਦਾ ਉਹ ਤਾਂ ਬਖਸ਼ ਦਿੰਦਾ ਛੜਨਾਏ ਤੇ ਸੰਠ ਲਾਏ ਇਹ ਉਹਦੀ ਛੜ ਚਲਾਏ ਜਦ ਇਹ ਤਾਂ ਕੰਟਰੋਲ ਹਾਂਜੀ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਏ ਹੁਣ ਇਹ ਇੱਕ ਨੂੰ ਸਬੋਧਨ ਕੀਤਾ ਹੋਇਆ ਅੱਛਾ ਆਦਮੀ ਨੂੰ ਵੀ ਵਿੱਚ ਸਬੋਧਨ ਦੇ ਤੂੰ ਪੈਰ ਕਰਿਆ ਹੋਇਆ ਗਲਤੀ ਸਕਦਾ ਸਵਾਲ ਨਖਤਰ ਤੇਰੀ ਮਦਦ ਕਰਨ ਵਾਸਤੇ ਸਮਝਾਉਣ ਵਾਸਤੇ ਗੁਰਬਾਣੀ ਭੇਜੀ ਹੈ ਪਰਮੇਸ਼ਰ तेरे ਸਰੀਰ ਤੈਨੂੰ ਦਿੱਤਾ ਸਮਝਣ ਵਾਸਤੇ ਆਇਓ ਲਾਹਾ लाहा ਪ੍ਰਾਣੀ ਆਇਓ ਲਾਹਾ ਲੈਣ ਪਰ ਲਗਿਆ ਕਿ ਤੱਕੋ ਫਕੜੇ ਸਭ ਮੁਗਦੀ ਚੱਲੀ ਰਹਿਣ ਇਹ ਵੀ ਕਿਹਾ ਹੋਇਆ ਹੈ ਪਰ ਇਹ ਤੇਰੀ ਜ਼ਿੰਮੇਵਾਰੀ ਹੈ ਹੁਣ ਹੁਣ ਕਿਹੜਾ ਰਾਹ ਤਿਆਰ ਕਰਦੇ ਠੀਕ ਹੈ ਜੀ ਤੂੰ ਆਪੇ ਆਪ ਸਭ ਕਰਤਾ ਕੋਈ ਦੂਜਾ ਕੀ ਕੀ ਦਾ ਉਹਦੇ ਪਾਣੀ ਤੇ ਚੱਲੂ ਚੰਦ ਸੂਰਜੋ ਮਾਇਆ ਹੈ ਤੇ ਆਪਣਾ ਰੂਪ ਬਣਾਉਣਾ ਹੈ ਤਾਂ ਰੂਪ ਬਣੂਰੇ ਇਹ ਰੂਪ ਬਣਾਣਾ ਹੈ ਸਾਧ ਆਪਣੀ ਆਪੇ ਕਾਢੀ ਬਹੁ ਗੁਰਬਾਣੀ ਤਾਂ ਸਾਡੂੰ ਉਪਦੇਸ਼ ਕਰ ਰਹੀ ਹੈ ਭਾਈ ਐ ਤੁਹਾਡਾ ਸਿਬਰ ਜੂਗਾ ਐ ਵਿਗੜ ਜੂਗਾ ਉਹ ਤਾਂ ਰਹਿ ਦੇ ਰਹੀ ਮੇਰੇ ਖਾਨੀ ਦਾ ਪ੍ਰਬੰਧ ਤਾਂ ਪ੍ਰਬੰਧਨ ਕੀਤਾ ਹੋਇਆ ਉਹ ਤਾਂ ਕਰਦਾ ਉਹ ਆਪੇ ਹਸਬਾ ਤੂੰ ਕੋਈ ਕੁਝ ਨਹੀਂ ਕਰ ਸਕਦਾ ਦਖਲ ਦੇ ਸਕਦਾ ਮੇਰੇ ਹਟਦਾ ਨਹੀਂ ਆदमी ਹੱਡੇ ਹੈ ਹਾਂਜੀ ਹਰ ਆਪੇ ਬੋਲਾ ਆਪ ਬੁਲਾਵਾ ਹਰ ਆਪੇ ਜਲ ਰਵ ਰਹੀ ਚਲ ਮਾਇਆ ਦੀ ਗੱਲ ਆ ਗਈ ਜਿਹੜਾ ਹਰ ਤਲਾ ਤੇਰੀ ਅੰਤਰਾਤਮਾ ਉਹੀ ਹੈ ਤੂੰ ਤਾਂ ਉਹਦੀ ਇੱਕ ਸੂਰਜ ਦੀ ਹਰ ਆਪੇ ਬੋਲਾ ਤੇਦਰ ਖੋਲ ਬੋਲਣਾ ਕੋਲ ਬੋਲਨੇ ਪਰਤਰੀ ਸੱਤ ਸਰੂਪ ਪਰਮ ਤਤ ਰੇਖ ਰੂਪ ਉਹ ਪਰਤਰੀ ਜਿਹੜਾ ਅੰਦਰ ਬੋਲਦਾ ਉਹਦੀ ਪੂਰਤੀ ਬਣਾ ਕੇ ਦਿਖਾ ਮੈਨੂੰ ਉਹਦੇ ਦਰਸ਼ਨ ਕਰ ਲੈਣੇ ਉਹ ਸਤ ਸਰੂਪ ਹੈ ਉਹ ਪਰਮ ਤਾਤ ਦਾ ਨਹੀਂ ਹੁੰਦਾ ਤੈ ਤਾਂ ਪੂਰਤੀ ਬਣਾ ਲਈ ਸ਼ਰੀਰ ਦੀ ਆਇਆ ਦੀ ਹਰ ਆਪੇ ਬੋਲਣਾ ਹੈ ਆਪੇ ਬੁਲਾਵੇ ਬੁਲਾਉਂਦਾ ਵੀ ਆਪੇ ਬੋਲਣਾ ਆਪੇ ਜਲ ਤਲ ਰਵ ਰਹੀ ਹੈ ਜਾਲਾ ਥਲ ਦੇ ਵਿੱਚ ਆਪੇ ਰਵੇ ਜਿੱਤ ਜੀਵਨ ਸਾਰਿਆਂ ਦੇ ਵਿੱਚ ਠੀਕ ਹੈ ਜੀ ਹਰ ਆਪੇ ਮਾਰੈ ਹਰ ਆਪੇ ਛੋੜੈ ਮਨ ਹਰ ਸ਼ਰਣੀ ਪੜ ਰਹੀ ਹੈ ਭਾਰਦਾ ਕੌਣ ਆਪੇ ਮਾਰਾ ਆਪੇ ਛੋੜਿਆ ਜੋ ਉੱਤਰ ਆਤਮਾ ਹੈ ਅਸਲ ਜੋ ਦੀ ਮਰਜੀ ਹੈ ਉੱਤਰ ਆਤਮਾ ਦਾ ਹੀ ਬਲ ਬਨ ਹਰਦਾ ਹੀ ਹੈ ਹਰਦਾ ਹੀ ਬੁੱਝੜਾ ਹੈਗਾ ਉਹ ਵਿਗੜਿਆ ਹੋਇਆ ਗੁਰਦੀ ਮਰਜੀ ਸਾਡਾ ਕਾਲ ਹੈ ਗੁਰਕਾ ਪਾਣੀ ਜਿਹੜਾ ਹੈ ਉਹ ਅਕਾਲ ਹੈ ਬਸ ਗੁਰਕੇ ਪਾਣੀ ਚੱਲੂਗੇ ਅੱਧਾ ਇਹ ਅਕਾਲ ਹੈ ਅੱਧਾ ਅੱਧੇ ਦਾ ਕਾਲ ਥੋੜਾ ਦੇਖਣਾ ਕਿਹੜੇ ਪਾਸੇ ਜਾਣ ਛੋਟਣ ਵਾਲਾ ਵੀ ਆਪ ਹੈ ਮੱਦ ਵਾਲਾ ਵੀ ਆਪ ਹੈ ਆਪੇ ਛੋਟਾ ਹਰ ਛਲਦੀ ਪੜ ਲਈਏ ਦੇਖੋ ਬੰਦੂ ਸਮੋਦਰ ਹਾਂਜੀ ਉਹ ਬਾਦ ਕੀ ਆਦੀ ਛਲਦੀ ਪੜਿਆ ਰਹਿ ਤੂੰ ਆਪਣੀ ਮਰਜ਼ੀ ਨਾ ਕਰ ਜੋ ਬਾਦ ਦੀ ਦਾ ਇਹ ਨੂੰ ਸੱਚ ਨਾ ਬਨ ਹਾਂਜੀ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਮਾਰਦਾ ਹੋਈ ਜਾਉਂਦਾ ਕਰਦਾ ਉਹਦਨ ਆਪਣੇ ਵਿੱਚੋਂ ਪੈਦਾ ਕਰਦਾ ਬੰਗਲਾ ਕਿੱਥੋਂ ਪੈਦਾ ਹੋਇਆ ਸੁਰਤ ਕਿੱਥੋਂ ਪੈਦਾ ਹੋਈ ਕਿਰਨ ਕਿੱਥੋਂ ਪੈਦਾ ਹੋਈ ਐ ਸੂਰਜ ਤੋਂ ਜੇ ਉਹ ਅੱਖ ਬੀਜ ਲਵੇ ਸੂਰਜ ਤਾਂ ਬਸ ਕਿਰਨ ਹੋਣੀ ਬੰਦ ਹੋ ਜਾਣ ਸੂਰਤ ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਐ ਆਦਿ ਕਰਕੇ ਨਿਚਿੰਦ ਹੋ ਕੇ ਨਸਰ ਬੈਠੇ ਤਰੋ ਕੇ ਰਹੋ ਤੇਰੇ ਜਿਹਾ ਤੇਰਾ ਅਫਜ਼ਰ ਬੈਠਾ ਅਫਜ਼ਰ ਉਹਦੇ ਹੱਥ ਵਿੱਚ ਹੈ ਸਭ ਕੁਝ ਜੇ ਤੂੰ ਆਪੜੋਂ ਦੋਨੋਂ ਆਪਸ ਵਿੱਚ ਸੁਝਾ ਲਵੇ ਅੰਦਰ ਆਤਮਾ ਦੀ ਛਲ ਪੈਜ ਬਿ ਜਾ ਕੇ ਕੋਈ ਦਰਮਾਣ ਵਾਲਾ ਨਹੀਂ ਹੈ ਫਿਰ ਤੂੰ ਵਰਤੋਂ ਪਰੇ ਕਰਿਆ ਜਾਂਦਾ ਜੇ ਆਪਣੇ ਪਾਣੀ ਚੱਲੇਗਾ ਉਹ ਵਰਦਾ ਦਾ ਫੇਰ ਬੜੀ ਸੌਂਦਾ ਜਾਗਦਾ ਹੀ ਹੈ ਧਰਮ ਜਨਾ ਚ ਤੇਰੇ ਅੰਦਰ ਉਹਨਾ ਚਿਰ ਤੂੰ ਧਰਮ ਦਾ ਰਹੇਗਾ ਪਰਵੇਂ ਭੂਲਾ ਦੇ ਦਿਸਤਾ ਹੈ ਤੈਨੂੰ ਭਰਮ ਹੈ ਕਿ ਮੈਂ ਕੁਝ ਕਰ ਸਕਦਾ ਜਬ ਲਗ ਜਾਣੇ ਮੈਂ ਕੁਛ ਕਰਤਾ ਤਬ ਲਗ ਦਰਬ ਜੋਰ ਵੀ ਫਿਰ ਉਡ ਚੁਬੇ ਬਾਰੀ ਕਿਹਦੀ ਪੜੀ ਹੋਈ ਏ ਸਾਰੀ ਪਰਮ ਦਾ ਨਾਸ ਗੁਰਬੰਦੀ ਕਰ ਰਹੀ ਹੈ ਪਰਮ ਦਾ ਜਦ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖੀ ਫਰ ਲਹੀਐ ਆ ਉੱਡਦੇ ਆਂ ਬਹਿੰਦੇ ਸਦਾ ਹਰ ਨਾਮ ਧਿਆਈਐ ਹਰ ਨਾਮ ਤੇ ਧਿਆਨ ਰੱਖਣਾ ਚਾਹੀਦਾ ਕਿਆ ਨਾਨਕ ਗੁਰਮੁਖੀ ਹਲਖਾ ਐਸਾ ਜੇ ਗੁਰਮੁਖ ਹੋ ਜੈ ਨਾ ਉੜਦੇ ਬੈਹਣਿਆ ਸੁੱਤੇ ਸਦਾ ਸਦਾ ਹਰ ਨਾਮ ਦੇ ਵਿੱਚ ਧਿਆਨ ਰੱਖੇ ਉਹ ਕਹਿੰਦੇ ਗੁਰਮੁਖ ਹੁੰਦਾ ਪ੍ਰਾਪਤੀ ਕਰ ਹਰ ਦੇ ਵਿੱਚੇ ਸਮਾ ਹਰ ਨਹੀਂ ਬਰਿਆ ਕਦੇ ਵੀ ਸਤਿਗੁਰ ਜਾਗਤਾ ਹੈ ਦਿਉ ਪੂਲੀ ਪਾਲਣੀ ਸਤਿਗੁਰ ਨਹੀਂ ਬਰਦਾ ਕਦੇ ਜਦੋਂ ਕਿ ਜਿਹੜਾ ਜਾਣਦਾ ਹੈ ਅੱਗੇ ਹੰਸ ਇਕੱਲਾ ਹੰਸ ਨੇ ਪਰਮ ਹੰਸ ਬਣ ਜੇ ਹੰਸ ਪਰਮ ਹੰਸ ਬਣ ਗਿਆ ਨਾ ਸਤਿਗੁਰਤਾ ਹੈ ਪਰਮ ਸਤਿਗੁਰਤਾ ਹੰਸ ਤਾਂ ਹੈ ਹੈ ਪਰਮ ਸਤਿ ਦੀ ਜਿਹੜੇ ਨੇ ਨਾ ਉਹ ਹੋਰ ਨੇ ਸਾਡੇ ਗੁਰਮਤ ਦਾ ਜਿਹੜਾ ਹੰਸ ਪਰਮ ਹੰਸ ਹੈ ਉਹ ਚਾਰੇ ਪਦਾਰਥ ਪਾਇਸਦੇ ਉਹ ਹੈ ਗੁਰਮੁਖ ਠੀਕ ਹੈ ਹਾਂਜੀ ਬਡ ਵੀ ਪਰਮ ਹੰਸ ਹੈ ਉਹ ਬਡ ਹੈ ਸਭ ਤੋਂ ਵੱਡਾ ਅਲਪ ਪਰਵਤ ਠੀਕ ਹੈ ਜੀ ਬਲੰਦ ਹਾਂਜੀ ਨਾਲੇ ਤਾਂ 21ਵੀਂ ਦੀ ਸਮਾਪਤੀ ਨਾਲੇ ਬਡਾਂਸ ਕੀ ਬਾਦ ਦੀ ਸਮਾਪਤੀ ਹੈ ਜੀ ਹਾਂਜੀ